ਸ਼ਲੋਕ ਮਹਲਾ ਤੀਜਾ ਤਾਰਸਨਾ ਜਲ ਜਾਓ ਜਿਨ ਹਰਕਾ ਕਾ ਨਾ ਪਾਇਆ ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮਨ ਵਸਾਏ ਤਾਰਸਨਾ ਜਲ ਜਾਓ ਰਸਨਾ ਜਲ ਜਾਵੀਂ ਚਾਹੀਦੀ ਐ ਕਿਹੜੀ ਇਹਨੇ ਨਾ ਪਾਇ ਜਿਹਨੂੰ ਸਰਦਾ ਕੈਸੇ ਆਇਆ ਉਹ ਰਸਨਾ ਚਲਦੀ ਭਾਈ ਜੀ ਰਸਨਾ ਸੌਤਾ ਜਿਹਨੂੰ ਆਇਆ ਸੋਦਾ ਮਸੀਦ ਕਹਿੰਦਾ ਮੈਨੂੰ ਨਹੀਂ ਆਇਆ ਉਹ ਕਹਿੰਦਾ ਉਹ ਦੇਸ ਵੀ ਮੈਨੂੰ ਆਇਆ ਉਹਦਾ ਮੰਨ ਗਿਆ ਵੀ ਉਹਦੇ ਵਾਲੇ ਤਾਂ ਚੜ ਗਈ ਬਾਕੀ ਤਾਂ ਉਹ ਤਾਂ ਥੱਲੇ ਥੱਲੇ ਵਾਲੇ ਹੀ ਨੇ ਹੋਰ ਤਾਂ ਕੋਈ ਦੀਦਾ ਜਿਹਨੂੰ ਹਰਕਾ ਸੋਹ ਨਹੀਂ ਸੋਹ ਨਹੀਂ ਆਇਆ ਵੈਰੂ ਵੈਰੂ ਵਾਲੇ ਵੀ ਸੁਣ ਲੈਣਾ ਆਏ ਹਾਲ ਤਹੁੰਦੀ ਹੈ ਇਹ ਫਰਮਾਨ ਦਰਗਾਹ ਦਾ ਸਾਡਾ ਕੀ ਆਇਆ ਹੈ ਜੇ ਨਾਮ ਦਾ ਟੈਸ ਆਇਆ ਜਿਹੜੀ ਦਸਾਂ ਚਲ ਚਾੜੀ ਫਕੀ ਕੋਈ ਕਰ ਲੋ ਪਖੰਡ ਕੋਈ ਕਰ ਲੋ ਨਾਟੋ ਕਰੀ ਜਾਓ ਕੀਰਤ ਸਰਵਾਰ ਕਰੀ ਜਾਓ ਖੰਡ ਪਾਠ ਜੋ ਮਰਜੀ ਕਰੀ ਜਾਓ ਤੇ ਰਸਨਾ ਫਿਰ ਬੁੱਧੀ ਦੀ ਗੱਲ ਹੈ ਜੀ ਰਸਨਾ ਬੁੱਧੀ ਆ ਬੁੱਧੀ ਸਭੇ ਬੁੱਧੀ ਖਾਲੀਏ ਨੇ ਕਰਾਇ ਤੱਕ ਬੁੱਧੀ ਨੂੰ ਹੋਣਾ ਰਸਨਾ ਜੀਬ ਜੀਬ ਤਾਂ ਸਾਰਿਆਂ ਦੀ ਜਲ ਚੜੀਆਂ ਇੱਥੇ ਜੀਬ ਕੀ ਨਹੀਂ ਬਚਾਈ ਸਭ ਮੈਂ ਬੁੱਧੀ ਜਾਲੀਆਂ ਨਾ ਕਿ ਕਰਾਹ ਤੱਕ ਗਿਆ ਤੱਕ ਗਿਆ ਤੋਂ ਸਖੜੀ ਬੁੱਧੀ ਜਿੰਦੀਆਂ ਸਭ ਹੋਇਆ ਉਹਨੇ ਚੱਟ ਦਾ ਸੋਅ ਲਿਆ ਹੋਇਆ ਤਾਂ ਵਜੂ ਵੀ ਉਹ ਸਭ ਜਲ ਜਾਂਦੀ ਉਹਦੇ ਠੀਕ ਹੈ ਜੀ ਆਹ ਜਿਹੜੀ ਕਿੱਤਾਂ ਜੇ ਕੋਈ ਸੁਣਵੇ ਤੇ ਕਿੰਤਾ ਹੋ ਜਵੇ ਤਾਂ ਸਿੱਖ ਬਣ ਜੂਗਾ ਜੇ ਮਨ ਬੁਸ਼ਤੀ ਜਿਵੇਂ ਤੁਰੇ ਜਾ ਤੁਰੇ ਚਲੋ ਹਾਂ ਜੀ ਨਾਨਕ ਰਸਨਾ ਸ਼ਬਦ ਰਸਾਏ ਸ਼ਬਦ ਰਸਾਏ ਰਸ ਕਿਥੋਂ ਸਵਾਲ ਤਾਂ ਇਹ ਹੈ ਉਹ ਕਿਹੜਾ ਰਸ ਹੈ ਕਿਥੋਂ ਰਸਨਾ ਸ਼ਬਦ ਰਸਾਏ ਸ਼ਬਦ ਕਿਉਂ ਹਾਂਜੀ ਇਹਦੇ ਜਿਹੜਾ ਸੌਣ ਨਾਨਕ ਰਸਨਾ ਸ਼ਬਦ ਰਾਸ ਆਏ ਸ਼ਬਦ ਵਿੱਚ ਜਿਆ ਸਮਾ ਇਹ ਕਿਹੜੀ ਸ਼ਬਦ ਹੋਈ ਠੀਕ ਹੈ ਜੀ ਹਾਂਜੀ ਆਸਾਂ ਜਿਨੀ ਹਰ ਹਰ ਮਨ ਵਸਾਇਆ ਅਸਾਂ ਠੀਕ ਹੈ ਜੀ ਮਹੱਲਾ ਤੀਜਾ ਸਾਰਸਨਾ ਜਾਓ ਜਿਨ ਹਰ ਕਾ ਨਾਮ ਨਾਨਕ ਗੁਰਮੁਖ ਰਸਨਾ ਹਰ ਜੱਪੈ ਹਰ ਕੇ ਨਾਂ ਹੀ ਪਿਆਰੀਆ ਪਹਿਲਾਂ ਮਸਲਵਾ ਉਸ ਵੇਲੇ ਬੜੇ ਜੋਸ਼ ਸ਼ੋਰ ਨਾਲ ਲੱਗੇ ਹੋਏ ਤੇ ਪੈਨਲ ਬੁਰੂ ਕਰਦੇ ਦੇ ਖਿਲਾਫ ਇਹ ਲਾਈਨਾਂ ਤਾਂ ਲਿਖੀ ਹੋਈਆਂ ਨੇ ਗੱਲਾਂ ਇਹਨਾਂ ਦੀ ਲੋੜ ਨਹੀਂ ਸੀ ਇਹਨਾਂ ਲਾਈਨਾਂ ਦੀ ਲੋੜ ਕਿਉਂ ਪਈ ਲੈਣ ਸੀ ਕੋਈ ਹਿਸਤੀ ਇਹਨਾਂ ਪਿੱਛੇ ਚੁਪੀ ਹੋਈ ਬਹੁਤ ਵੱਡੀ ਪੰਜਵੇਂ ਲੱਗੇ ਹੋਏ ਨੇ ਉਨਾਦੂ ਆਲਮ ਉਹ ਜਾਣਾ ਗੁਰੂ ਘਰ ਦੇ ਤਾਂ ਮਿਲਦਾ ਹੀ ਤੇ ਸਾਰਾ ਸਨਾ ਜਲ ਜਾਓ ਜਿਨ ਹਰ ਕਾ ਨਾਮ ਵਿਸਾਰਿਆ ਨਾ ਨਰ ਦਾ ਨਾਮ ਵਿਸਾਰਿਆ ਲੱਗਿਆ ਹੋਇਆ ਹੈ ਠੀਕ ਹੈ ਜੀ ਜੱਲ ਨਾਲ ਤਾਂ ਤਾਲੀ ਨਾਨਕ ਗੁਰਮੁਖੀ ਰਸਨਾ ਹਰ ਜਪੈ ਹਰ ਨਾਨਕ ਗੁਰਮੁਖੀ ਰਸਨਾ ਹਰਿਪਾਇ ਨਾਨਕ ਗੁਰਮੁਖਾਂ ਦੀ ਰਸਨਾ ਜਿਹੜੀ ਆ ਉਹ ਹਰ ਜਪਦੀ ਆ ਬਾਕੀ ਜਪਦੀ ਕਿਸੇ ਦੀ ਵਿਦਵਾਨ ਸਾਰੇ ਹੀ ਮਾਰਤੇ ਸੰਤ ਸਾਰੇ ਹੀ ਮਾਰਤੇ ਜੋ ਦਾ ਛੜਿਆ ਹੀ ਕਖਲੀ ਪੱਖ ਦੀ ਛੜਿਆ ਕਿਸੇ ਦਾ ਗੁਰਮੁਖੀ ਰਸਨਾ ਤੇ ਸਬਾ ਕੋਈ ਰਸਨਾ ਹਾ ਜਪਦੀ ਹਰ ਤੇ ਬਾਕੀ ਜਿਹੜੇ ਰੌਲਾ ਪਾਉਂਦੇ ਨੇ ਜੱਥੇ ਪਾਉਂਦੇ ਨੇ ਉੱਥੇ ਇਹ ਥੋੜਾ ਹੱਥ ਥੋੜਾ ਹੱਥ ਨਹੀਂ ਸਾਇਦ ਆਲੋ। ਤੁਹਾਨੂੰ ਗੁਰਬਾਨੇ ਦੇ ਦੇੜੇ ਆਉਣ ਦਾ ਵੀ ਹੱਕ ਨਹੀਂ ਤੁਹਾਡੇ ਕੋਲ ਤਾਂ। ਗੁਰਬਾਨੇ ਦਾ ਖਦਰਾ ਵੀ ਦਵਾਣਾ ਨੂੰ। ਠੀਕ ਕੋਲ। ਪਰ ਮੁਕਰ ਸੁਣੋ ਹਾਰ ਜਾਪਾ। ਹਰਗੇ ਨਾਲ ਪਿਆਰ ਨਾਲ ਦਾ ਪਿਆਰ ਹੁੰਦਾ ਤਾਂ ਚੱਬਦੀ। ਠੀਕ ਹੈ ਜੀ। ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਈ ਹਰ ਆਪੇ ਵੇਖੈ ਵਿਖੈ ਆਪੇ ਜਿਤ ਭਾਵੈ ਤਿਤ ਲਾਈ ਸੇਵਕ ਭਗਤ ਸੇਵਕ ਵੀ ਆਇਆ ਭਗਤ ਵੀ ਆਇਆ ਠਾਕੜ ਵੀ ਆਪਈ ਹੈ ਸਭ ਕੁਝ ਆਪੇ ਹੀ ਹੈ ਇਹ ਢਾਗੜ ਹੈ ਤਾਂ ਸੇਵਕ ਵੀ ਹੈ ਤੇ ਸੇਵਕ ਹੈ ਤਾਂ ਭਗਤ ਅਸਲ ਦੇ ਵਿੱਚ ਭਗਤ ਸੇਵਕ ਹੁੰਦਾ ਸਭਤ ਦੁਨੀਆਂ ਨੂੰ ਭਗਤੀ ਪੜਾਉਂਦਾ ਹੁੰਦਾ ਗੋਵੀ ਦਾ ਪਰਮੇਸ਼ਰ ਦੀ ਠੀਕ ਹੈ ਜੀ ਬੋਲੀ ਪਰ ਸਰੀਰ ਉਹਦੇ ਕੋਲ ਹੁੰਦਾ ਹੈ ਸਰੀਰ ਪਰਮੇਸ਼ਰ ਸਰੀਰ ਪਰਮੇਸ਼ਰ ਵਰਤਦਾ ਪਰਮੇਸ਼ਰੇ ਪੜਾਉਂਦਾ ਹੁੰਦਾ ਤਾਂ ਉਹਦੇ ਕੋਲ ਜਦ ਇਹ ਬਲਬ ਖਾਣਾ ਵਰਤਦਾ ਭਗਤ ਛੋਡੇ ਦਾ ਨਾਮ ਹੈ ਕਿਸੇ ਦੀ ਭਗਤੀ ਕਰਦਾ ਹੁੰਦਾ ਭਗਤ ਹੋਦਾ ਸੇਵਕ ਹੁੰਦਾ ਠੀਕ ਕਰਦਾ ਉਹ ਉਹ ঠাকুর ਹੁੰਦਾ ਹੈ ਜੀ ਉਹ ਸਭੇ ਨਾਲ ਜੋੜਦਾ ਹੈ ਵੀ ਮੈਂ ਵੀ ਉੱਥੇ ਜੁੜਿਆ ਵਡਿਆਈ ਉਹ ਆਪਣੇ ਵਡਿਆਈ ਕਿਸੇ ਦੀ ਵਡਿਆਈ ਨਹੀਂ ਕਰਦਾ ਅਰ ਆਪੇ ਕਰੇ ਕਰਾਇਆ ਆਪੇ ਕਰਦਾ ਆਪੇ ਹੀ ਜੋ ਸੰਸਾਰ ਵਿੱਚ ਹੋ ਰਿਹਾ ਨਾ ਕਹੇ ਸਾਥੇ ਕਰਾਉਂਦੇ ਉਹ ਸਰਵਣ ਕੋਤਬਾਪ ਕੋਈ ਨਹੀਂ ਉਹਦੇ ਰਾਜਪੂਤ ਬਾਪ ਸਾਡੇ ਜਿਵੇਂ ਨਹੀਂ ਹੈ ਅਸੀਂ ਗੁੱਡੀ ਚਾਹ ਨਾ ਬੀ ਠੀਕ ਹੈ ਜੀ ਅਸੀਂ ਉਹਦਾ ਖਲਾਇਆ ਕਰਦੇ ਆ ਆਪੇ ਕਰੇ ਫਸਲ ਜੋ ਉਹਨੇ ਉਹ ਅਸੀਂ ਆਪਣਾ ਜੁਮਾ ਲੈ ਲੈਂਦੇ ਜਿਹੜਾ ਨਾ ਤਦੀ ਅਜੇ ਦੁਰਮਤਾ ਨਹੀਂ ਦੁਰਮਤਾ ਨੇ ਨਾ ਕਿਆ ਨਹੀਂ ਦਿੱਤੀ ਉਸਨੂੰ ਬਹੁਤੇ ਸਿਆਣੇ ਨੇ ਜਿਹੜੇ ਇਹ ਬਹੁਤੇ ਸਿਆਣੇ ਨੇ ਬਹੁਤ ਸਿਆਣੇ ਜਦ ਕਾ ਕੋ ਬਿਆਪਾ ਸਾਡੇ ਸੰਤ ਨੇ ਬਹੁਤ ਸਿਆਣੇ ਜਿਹੜੀ ਹੋਰ ਬੁੱਧਾਂ ਕਿ ਲਾਈਆਂ ਦੁਨੀਆਂ ਦੇ ਵਿੱਚ ਬਹੁਤ ਸਿਆਣੇ ਬਹੁਤ ਤੁਹਾਨੂੰ ਗੁਰਮਤ ਕਦੇ ਨਹੀਂ ਮਰਦੀ ਕੋਈ ਅਪਰਾਧੀ ਹੈ ਅਪਰਾਹੀ ਹੈ ਕਿ ਗਿਆਨ ਬਚ ਕੇ ਗਲਤ ਕੋਈ ਕਿਰ ਠੀਕ ਹੈ ਜੀ ਹਰ ਔਰ ਸਾਖੀ ਪੜਾਈ ਤੋਂ ਉਲਟ ਪੜਾਈ ਕਰਾਉਂਦਾ ਉਹ ਬਰਾਦੀ ਜੇ ਗੁੰਗਾਨਾ ਮੈਂ ਜਨਾ ਚਰ ਉਹਨਾਂ ਦੇ ਬਰਾਦੀ ਉਹਨਾਂ ਜਰ ਉਹ ਉਹਨਾਂ ਚਰ ਸਾਧ ਪੜਿਆ ਹੋਵੇ ਗੁੰਗਾਨਾ ਜਦ ਪੜ੍ਹਨ ਵਿੱਚ ਸਭਜਨ ਫੇਰ ਕਰਾਵੇ ਉਲਟ ਪੜਾਈ ਫੇਰ ਗੁੰਗਾਨਾ ਹੋਵੇ ਗੁੰਗਾਨਾ ਦਾ ਉਹ ਵੀ ਸਾਧ ਨਭਾਰੀ ਜਿਹੜਾ ਬਚਾਦਾ ਜਾਣਦਾ ਨਹੀਂ ਹੈ ਇਹਨਾਂ ਗਏ ਕਿ ਸੋਨੀ ਉਹ ਹੀ ਜੀ ਕਹਿੰਦੀ ਉਹ ਵੀ ਸਾਧ ਕੁਤਾ ਸਾਦੇ ਤੇ ਜੈਜੀ ਸੁਣਦੀ ਹੋਈ ਕਹਿੰਦੀ ਠੀਕ ਹੈ ਜੀ ਹਰ ਆਪੇ ਵੇਖੈ ਵਿਕਤੈ ਆਪੇ ਜਿਤ ਭਾਵੈ ਤਿਤ ਲਾਇ ਜਿਤ ਤਾਂ ਆਪ ਹੈ ਵੇਖਦਾ ਵੀ ਆਪ ਹੈ ਹਾਂਜੀ ਜਿਤ ਭਾਵੈ ਹਰ ਅੱਦਲਾ ਉਦੋਂ ਜਿਤ ਲਾਗਦੈ ਉਹ ਤੂੰ ਆਪਣੇ ਹੈ ਹਰ ਦਾ ਮਾਨ ਹੈ ਹਰ ਅੱਦਰਾ ਸਾਡਾ ਗੂਲ ਹੈ ਅਸਲ ਸਾਡੇ ਬੋਲ ਦੀ ਗਲਤੀ ਹੈ ਜਦੋਂ ਬੱਤੀ ਲਾਲ ਦੇਦ ਨਾ ਖੀਰਾਂ ਨੇ ਨਾ ਕੀਤਾ ਇਹ ਠੀਕ ਹੈ ਜੀ ਆਪਣੇ ਕਰ ਜਾਣ ਕਰ ਚਲਾ ਜਾਵੇ ਤੇ ਬੇਕਾਬੂ ਨਹੀਂ ਹੈ ਇੱਕ ਗੱਲ ਤੇ ਬਣਾਇਆ ਹੋਇਆ ਮੇਰਾ ਮਨ ਬੇਕਾਬੂ ਹੈ ਠੀਕ ਹੈ ਮਨ ਹੋਵੇ ਹੋ ਜਾ ਤੋ ਕਾਬੂ ਇਹ ਹੈ ਠੀਕ ਹੈ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉੱਜੜ ਪਾਏ ਆਰੇ ਜਦਨਾ ਮਾਰਗ ਪਾਏ ਆਪੇ ਆਰੇ ਜਦਨਾ ਉਜੜ ਪਾਏ ਕੋ ਜਣ ਜ ਪੈ ਜਾਂਦੇ ਨੇ ਖਾਰਗ ਪੈ ਜਾਂਦੇ ਨੇ ਹਰ ਇੱਕ ਨਾ ਮਾਰਗ ਪਾਏ ਹਰੇ ਮਾਰਗ ਤੇ ਪਾਉਂਦਾ ਮਨ ਨੂੰ ਆਰੇ ਉਜੜ ਸੋਕਰ ਹਰਾ ਬੰਦਾ ਸਾਮਤ ਹੋ ਗਿਆ ਉਜੜ ਜਾਪੇ ਪੈ ਗਿਆ ਠੀਕ ਹੈ ਜੀ ਉਹ ਬੁੱਧੀ ਕਹਿ ਰਹੀ ਆ ਗੱਲ ਹੋਰ ਹੈ ਬੁੱਧੀ ਕਹਿ ਰਹੀ ਹੈ ਉਹ ਗੱਲ ਹੋਰ ਹੈ ਉਏ ਬਰਪਲ ਆਏ ਭਕਤੀ ਲੈ ਸਭ ਤੇਰਾ ਹੁਕਮ ਆਪਾਰਾ ਉਹ ਬੁੱਧੀ ਦੀ ਗੱਲ ਹੈ ਕੋਈ ਤੂੰ ਇੱਟਾ ਉਹ ਕਹਿੰਦਾ ਆਪਾਰਾ ਜਿਹੜਾ ਰਹਿਮਾਨ ਹੈ ਇੱਦਾਂ ਪਰਪਲ ਉਹਦੇ ਤੂੰ ਭਕਤੀ ਲਾਉਣਾ ਮੈਂ ਦੱਸ ਕੀ ਕਰਾਂ ਉਹ ਭਕਤੀ ਆਇਆ ਉਹ ਭਕਤੀ ਦਾ ਜਿਹੜਾ ਕੋਈ ਸੰਬੰਧ ਨਹੀਂ ਹੈ ਉਹ ਗੱਲ ਹੋਰ ਹੈ ਹਾਂਜੀ ਹਾਏ ਆਪੇ ਸੱਚਾ ਸਾਹਿਬ ਸਖ ਤਪਾਸ ਅਜਿਹੜਾ ਤਪਾ ਹੈ ਨਾ ਤਪਾ ਵਸ ਇਹ ਵੀ ਸਾਧੂ ਸ਼ੁਰੂ ਕਰ ਇਹਨੂੰ ਵਸ ਵਿੱਚ ਕਰਦਾ ਹੈ ਅੱਛਾ ਜੀ ਨਾਲ ਜੋੜਦਾ ਤਪਾ ਵਸ ਇਹਨੂੰ ਵਸ ਵਿੱਚ ਕਰਦਾ ਹੈ ਦੋਨੋਂ ਕਰਦਾ ਇਹਨੇ ਆਪੇ ਆਪਣੇ ਦੋਨੋਂ ਵਸ ਵਿੱਚ ਤਪਾ ਵਸ ਪਰ ਵੇਖੇ ਚੱਲ ਤੋਂ ਪਾਏ ਚਲਦ ਕਰ ਚਲਤ ਸਵਾਇ ਸਾਰੇ ਚਲਤ ਨੇ ਤਫੇ ਤੇ ਚਾਹ ਵਸ ਖਲ ਲਵੇ ਚਾਹ ਨੋ ਖਲ ਲਵੇ ਕਾ ਖੁੱਲਾ ਘੜ ਲਵੇ ਇਹ ਤੋਂ ਆਪਣਾ ਮੋਢਿਆ ਨੂੰ ਚੋਰੀਆਂ ਡਾਕੇ ਬਚਪਨ ਤੇ ਜਿਵੇਂ ਬੜਾ ਕੋਣ ਨੂੰ ਡਾਕੇ ਮਾਰਨੇ ਚੋਰੀਆਂ ਆ ਬੁਲਟ ਉਲਟੇ ਗੁਰਪ੍ਰਸਾਦ ਕਹੇ ਜਨ ਹਰ ਸੱਚੇ ਕੇ ਗੁਣ ਗਾਏ ਗੁਰਪ੍ਰਸਾਦ ਕਹੇ ਜਨ ਨਾਨਕ ਹਾਂਜੀ ਕੇ ਗੁਣ ਗਾਏ ज्ञान दी तरफ गोलप्रसाद ने क्या भी करता जो ज्ञान है मेरे को ओधी रोशनी ने बीच गोलप्रसाद ज्ञान भी रोशनी कि मेरे को ज्ञान है मैं ओधी रोशनी कैह सकदा हूं कह रे हो चाहे जान नोड क हर सच्चे से गुण काए फिर वो हर सच्चे से गुण